ਅੱਖ ਬੋਲਣ ਕਿ ਆ ਜਗ ਸਿਉ ਬਾਦ ਝੂਰ ਮਰੇ ਦੇਖੇ ਪਰਮਾਦ ਅੱਖ ਬੋਲਣ ਗੱਲਾਂ ਕਰਦੇ ਨੇ ਹਾਂਜੀ ਇਹਨਾਂ ਨੂੰ ਕੋਈ ਤਾਂ ਅੱਖ ਦਾ ਬਿਮਾਰ ਤੇ ਬੜਬੜੀਆਂ ਗੱਲਾਂ ਆਰਟੀਕਲ ਲਿਖੀ ਜਾਂਦੇ ਨੇ ਰੋਜ਼ ਕੁਝ ਨਾ ਕੁਝ ਲਿਖੀ ਪਤਾ ਕੁਝ ਵੀ ਨਹੀਂ ਐ ਜੇ ਪਹਿਲਾਂ ਵੀ ਸੀ ਲੋਕ ਅੱਛਾ ਜੀ ਵੇਲੇ ਵੀ ਸੀ ਮਾਇਆਤਾ ਦੀ ਸਿੱਖ ਮਾਇਆ ਨਾਲ ਜੁੜੇ ਤੇ ਸਿੱਖਣ ਦੀ ਗੱਲ ਕਰਦੇ ਤੇ ਸਿੱਖੀ ਦੀ ਗੱਲ ਜਾਣਦੇ ਹੀ ਦੀ ਸੀ ਅੱਛਾ ਜੀ ਅੱਜ ਵੀ ਹੋ ਜਾਈਂਦੇ ਇਹਨਾਂ ਬੋਲਣਾਂ ਦਾ ਚੱਖ ਬਾੜਨਾ ਕਾ ਆਪਣਾ ਕੋਈ ਬਾਦ ਬਵਾਦਾ ਇਹਨਾਂ ਨਾਲ ਵਿੱਚ ਕੀ ਹੋ ਸਾਡਾ ਤਾਂ ਕੋਈ ਬਾਤ ਅਜੀਦਾ ਜੱਗ ਛੱਡਿਆ ਹੋਇਆ ਸਾਡਾ ਬਾਦ ਬਵਾਦ ਜਿਹਨੇ ਛੱਡਿਆ ਗਰਾਂਉ ਉਹਾਰੇ ਕਿਹਾ ਉਹਦੇ ਲੋਕਾਂ ਨੂੰ ਕੀ ਜੱਗ ਬਾਦਵਾਦ ਠੀਕ ਹੈ ਚੱਖ ਬੋਲਣਾ ਕਿ ਆ ਜੱਗ ਬਾਦ 100 ਬੋਰਨ ਮਰਨ ਦੇਖਿਆ ਪਰ ਇਹਦਾ ਝੁਰਕਾ ਬਥੇਰੀ ਪੇਖਾ ਪਰਮਾਦ ਪਰਬਾਦ ਜਿਹੜਾ ਪਰਮ ਆਤਮ ਨੂੰ ਦੇਖ ਲੈਂਦਾ ਉਹ ਸਭ ਥਾਰ ਵੱਲੋਂ ਚੁਰ ਜਾਂਦਾ ਹੈ ਸੰਸਾਰ ਸੰਸਾਰ ਬਿਲਕੁਲ ਫਰ ਗਿਆ ਜਾਂਦਾ ਹੋਤ ਛੋਟ ਛੋਟ ਕੇ ਉਹ ਤਾਂ ਇਹ ਨਾ ਛੁਰਾਉਂਦਾ ਵੀ ਨਾ ਕਹੂ ਸੰਸਾਰ ਨੂੰ ਐਨਾ ਪਟਾਵਾ ਹੁੰਦਾ ਉਹ ਆਪਣੇ ਸੰਸਾਰ ਨੂੰ ਜੜੂਦਾ ਹੂੰ ਸੰਸਾਰ ਦੀ ਗੱਲ ਕਦੋਂ ਕਰੂ ਉਹ ਕੀ ਲੈਣਾ ਸੰਸਾਰ ਤੇ ਉਹ ਤਾਂ ਪਹਿਲੇ ਪਸਤਾਵੇ ਦਾ ਹੀ ਹੁੰਦਾ ਹੁੰਦਾ ਜੁੜੇ ਨਾ ਪਹਿਲੇ ਉਹਦੇ ਕੰਡੇ ਚੁਬੇ ਹੋਈ ਜਿਹੜੀਆਂ ਸੁਬਾ ਜੁਬੀਆਂ ਦੀ ਉਹਦੇ ਹੀ ਆ ਜਖਮ ਮਤਲਬਾ ਕਿਸਕ ਦੇਵ ਦੇ ਨੇ ਨਾ ਮੈਨੂੰ ਕਿੱ데 ਜਖਮ ਕਿਉਂ ਕਰੂ ਉਹ ਪਹਿਲੀ ਚੋਬ ਕੋ ਬਿਰਨ ਬੁਲਾਤੇ ਪਹਿਲੀਆਂ ਚੋਬਾਂ ਜਿਹੋ ਤਕਲੀਫ ਨੂੰ ਆਦੋਦਦੀ ਹੈ ਉਹਨੇ ਕੀ ਲੜੇ ਨੇ ਲੋਕਾਂ ਦੇ ਠੀਕ ਹੈ ਜਿਵੇਂ ਕਬੀਰ ਜੀ ਕਹਿੰਦੇ ਬਨਕੀ ਦਾਦੀ ਲੱਕੜੀ ਹੈ ਜੀ ਠੀਕ ਹੈ ਜੀ ਜਨਮ ਮੋਏ ਨਹੀਂ ਜੀਵਨ ਆਸਾ ਆਏ ਚੱਲੇ ਪਏ ਆਸ ਨਿਰਾਸਾ ਜਨਮ ਹੋਏ ਇਹ ਜਨਮ ਕੋਈ ਬਰੀ ਆਈ ਹੈ ਜੀਵਨ ਦੀ ਆਸਾ ਕਿੱਥੋਂ ਕਰ ਲੂ ਹੂੰ ਇਹਨੂੰ ਜਨਮਦਾਲ ਬੁਰਾਈ ਪਤਾ ਲੱਗਿਆ ਅਗਲੇ ਜੀਵਨ ਵੀ ਆਸਾ ਕਿੱਥੇ ਕਰ ਲੂਗਾ ਜਨਮ ਬੂਹੇ ਜਨਦੇਰੇ ਬੰਦੇਰੇ ਅਗਲੇ ਜੀਵਨ ਦੀ ਜੀਵਨ ਦੀ ਆਸਾਈ ਨਹੀਂ ਹੋਣਾ ਆਸਾ ਹੋਆ ਜਿਹਨੇ ਬੜਨਾ ਜਾਣੇ ਮਰਦਾ ਮਰਦਾ ਜਗ ਬੂਹੇ ਮਰ ਵੀ ਲੋ ਜਾਣੇ ਕੋਏ ਜੇ ਐਸੀ ਬਣਨੇ ਜੋ ਬੜੇ ਬੋੜਾ ਨਾ ਹੋਏ ਉਹਨਾਂ ਨੂੰ ਜੀਵਨ ਆਸਾ ਉਹਨਾਂ ਦੇ ਅੰਦਰ ਇਨਾ ਲੋਕਾਂ ਨੂੰ ਕੀ ਪਤਾ ਜੀ ਬਣਾ ਸਕੀ ਹੁੰਦੀ ਹੈ ਇਹਦਾ ਸਾਰਾ ਹੀ ਠੀਕ ਹੈ ਇਹਦਾ ਉਹ ਹੀ ਚੌਧਰੀ ਬਣ ਜਾਂਦੇ ਨੇ ਤਰਫ ਦੇ ਪਤਾ ਪਤਾ ਵੀ ਕੁਝ ਵੀ ਹੁੰਦਾ ਨਹੀਂ ਸਾਰੇ ਵੀ ਫਰਕ ਹੁੰਦਾ ਠੀਕ ਹੈ ਜੀ ਆਏ ਚੱਲੇ ਭਏ ਆਸ ਨਿਰਾਸ ਆਏ ਚੱਲੇ ਭਏ ਆਸ ਨਾਦ ਆਏ ਵੀ ਚਲੇ ਵੀ ਗਏ ਕੀਆ ਸਾਹ ਲੈ ਗਿਆ ਤੇ ਉਹ ਦਰਸਾ ਸਿੱਖਲੇਗੇ ਤੇ ਜਾਣੀ ਦੀ ਹੂੰ ਰਾਹਾਈ ਲੈ ਕੇ ਜਾਣੀ ਦੀ ਤੇ ਜਾਣੀ ਦੀ ਹਾਂਜੀ ਚੂਰ ਚੂਰ ਕਸ ਮਾਟੀ ਰਲ ਜਾਏ ਕਾਲ ਨਾ ਹਰ ਗੁਣ ਗਾਇ ਚੋਰ ਚੋਰ ਚੱਕ ਰਲ ਜਾਏ ਚੁਰਦੇ ਚੁਰਦੇ ਚੱਕ ਮਾੜਦੇ ਬੰਦੇ ਅਖੀਰ ਮਿੱਟੀ ਰਲ ਜਾਂਦੇ ਨੇ ਲੋਕ ਇਹ ਬੜੀ ਉਸਾਰੀ ਦੀ ਗੱਲਾਂ ਕਰਨ ਨੇ ਬੜੇ ਬੜੇ ਗਿਆਨੀ ਬਣਦੇ ਨੇ ਚੁਰਚੁਰ ਚੁਰਤੇ ਨੇ ਵੀ ਆਹ ਮੇਰੀ ਗੱਲ ਕਿਉਂ ਦੀ ਬੰਦਾ ਉਹ ਸੁਣੇ ਤੇਰੀ ਗੱਲ ਸੁਣਨ ਵਾਲੀ ਹੈ ਉਹ ਦੀ ਠੀਕ ਹੈ ਜਾਏ ਕਾਲ ਨਾ ਚੰਪੇ ਕਾਲ ਜਿੰਬੜਿਆ ਆਇਆ ਉਹ ਛੜਦਾ ਦੀ ਹੈ ਆਲਦਾ ਪਤਾ ਹੀ ਨੀ ਵਿੱਚ ਬੜਿਆ ਹੋਇਆ ਹਰਗੁਣ ਗੋਲਦਾ ਦੀ ਤੇ ਚਾਗਮਾਕੀ ਰਹਿਣਾ ਹੀ ਹੋਂ ਹੈ ਜੀ ਤੇ ਹਰਗੁਣ ਗਾ ਲੇਗਾ ਕਾਲ ਚੰਪੇ ਦਾ ਮਤਲਬ ਹੁੰਦਾ ਜੀ ਸਤਾਉਂਦਾ ਨਹੀਂ ਹੈ ਰਸੂਲ ਜੀ ਉੱਡਾ ਉਹ ਨੂੰ ਕਾਲ ਬਿਨ ਠੀਕ ਹੈ ਜੀ ਇਹ ਲੈ ਸੁੱਕੀ ਲੱਕੜੀ ਨੂੰ ਕੋੜਦਾ ਸਾਈ ਸ਼ੂਕ ਖਾਈ ਜਾਂਦੀ ਉਹ ਨਹੀਂ ਪਤਾ ਸੁੱਕੀ ਲੱਕੜੀ ਨੂੰ ਸੁੱਕੀ ਲੱਕੜੀ ਨੂੰ ਨਹੀਂ ਪਤਾ ਕੋਣ ਤੈਨੂੰ ਕੋੜਦਾ ਨਹੀਂ ਆ ਤੈਨੂੰ ਖਦੀ ਹੈ ਠੀਕ ਹਰ ਕੇ ਨਾਹੀਂ ਆਪੇ ਦੇਵੇ ਸਹ ਕਹਾਈ ਨਵਨਦ ਹਰਕੇ ਨਾਏ ਹਰਕੇ ਲੋਗ ਨੇ ਨੀ ਲੋਰੀ ਦੀ ਪਾਲੀ ਨਵੀਂ ਬੁੱਧੀ ਆ ਗਈ ਜੀ ਤੇ ਕੋ ਸਮਾ ਦੇ ਗਿਆ ਨਾ ਜੀ ਨੇ ਪਾਲਿਆ ਹਰਕੇ ਲੋਗ ਦਾ ਹਾਂਜੀ ਕਹਾਈ ਨਵਨਦ ਹਰਕੇ ਲੋਏ ਆਪੇ ਦੇਵੇ ਸਹਿ ਸੁਭਾਈ ਦੇਵੇ ਸਹਿ ਸੁਭਾਈ ਅਪ ਜਿੱਦਾ ਹੋਈ ਹੈ ਸਹਿ ਜਵਸਤਾ ਜੋ ਆਖੀ ਸਵਾ ਟਿਕ ਜਾਂਦਾ ਫਿਰ ਹਾਂ ਹਾਂ ਜਾਇ ਕਿ ਰਿਐਂਦੋਂ ਪਦੇ ਨਾ ਸੰਸਾਰੀ ਛਗੜੀਨੋਂ ਤੋਂ ਪਰੇ ਉਮਰਾ ਝਗੜਣਾ ਰਹਾ ਦੁਰ ਕੋ ਉਪਰ ਨੂੰ ਨਹੀਂ ਕੋਈ ਮਿਲਦਾ ਹੈ ਜਿਹੜਾ ਆਤਮਾ ਨੂੰ ਮਿਲਦਾ ਝਗੜਾ ਇਹਨਾਂ ਦੇ ਪੱਦੇ ਝਗੜਾ ਹੀ ਜਾਂਦਾ